ਇਹ ਨਸ ਖੈਰ ਲਾਹੌਰ ਦੀ ਮੋਰੀ ਤੇ ਇਹਨੂੰ ਅਸੀਂ ਮੋਰੀ ਦਾ ਸਾਕਾ ਆਖ ਸਕਦੇ ਹਾਂ ਮੋਰੀ ਵੀ ਵਾਰ ਆਖ ਸਾਕੇ ਦਾ ਵਰਤਾਰਾ ਹੈ ਇਸ ਖੰਡੇ ਨੇ ਵੀ ਉਲਕਾ ਜਿਹੀ ਕਿ ਬਾਕਾਇਦਾ ਐਪਿਕਲੀ ਵਰਤਿਆ ਜਾਂਦਾ ਜਿਵੇਂ ਬਰੂਚੀ ਚ ਤਪਤਰ ਸ਼ੇਰ ਦੀ ਰੀਤ ਹੈ 11ਵੀਂ ਸ਼ਰੀਰ ਦਾ ਵਾਕਿਆ ਹੈ ਇਦੇ ਅੰਦਰ ਮੁختلف ਕਬੀਲਿਆਂ ਦਾ ਜ਼ਿਕਰ ਆਏਗਾ ਮੁختلف ਲੋਕਾਂ ਦਾ ਜ਼ਿਕਰ ਤੇ ਲੁਕਾਈ ਦਾ ਸਾਕਾ ਤੇ ਕੁਝ ਹਿੱਸੇ ਦੇ نزد ਦੇ ਮੁਸ਼ਕਲ ਲਿਖਣਗੇ ਕਿ ਨਹੀਂ ਲੋਕਾਂ ਦੇ ਆਪਣੇ ਅੱਖਰ ਨੇ ਮੈਂ ਇਹਨਾਂ ਲੋਕਾਂ ਤੋਂ ਸੁਣ ਕੇ ਇਹਨਾਂ ਅੱਖਰ ਨੂੰ ਇਸ ਨਜ਼ਰ ਵਿੱਚ ਕਾੜਿਆ ਹੈ ਮੂਰੀ ਦਾ ਸ਼ਾਕਾ ਲਾਂਗ ਥੀ ਲਾਂਗ ਬਦ ਅੜੀਏ लांग थी लांग पर रोए अड़िए तल भी लांगा जाप ਨਾ हाथ जट मुहस्सद सावे ਨਾ शावा दे खापे ना जादू ना चांद ना सूरज ना उत्तम लॉ पवन परी छत पांड कन्हैया ना भैरो ना भूत पाल ना रावल काल अकाल पास ਜਦ ਖਿਜ਼ਰ ਬਰਾਮਾ ਕੇ ਲੰਗ ਥੀ ਲੰਗ ਬਦਰੋਏ ਅੜੀਏ ਤਦ ਵੀ ਲੰਗਾ ਜਾਪੇ ਨਾ ਹੱਥ ਚੱਟ ਮਹਸਬ ਸਾਵੇਂ ਨਾ ਸ਼ਾਵਾਂ ਦੇ ਨਾ ਜਾਦੂ ਨਾ ਤੰਦ ਨਾ ਸੂਰਜ ਨਾ ਉਤਮ ਲੋ ਪਵਨ ਪਰਿਛਤ ਪਾਂਡ ਕਨਈਆ ਨਾ ਬੈਰੋਂ ਨਾ ਭੂਤ ਪਾਲ ਨਾ ਰਾਵਲ ਕਾਲ ਅਕਾਲ ਬਾਸ ਜਦ ਖਿਜ਼ਰ ਬਰਾਮਾ ਮੈਂ ਮੋਰੀ ਦਾ ਦਮ ਏਕ ਲਾਭ कम ना सोड ਦੇਵੇ नफर कर ਜੰਮੇ जागे जम, अगे ਅਸਪਸਵਾਰ ਮੈਂ ਮੋਰੀ मैं, मैं कंड शहर ਦੀ ਬਦਰੋ ਕਾਂਕ ਕਰੋ ਦਾਵੋ ਕੁਲ ਜੰਮਿਓ ਜਿਹੜਾ ਆਣ ਟੜੀ ਤੇ ਚੜ ਜਾਏ ਸੋਇਓ ਚਟਿਆ ਜਾਵੇ ਸਰ ਸਰਖੇਡ ਮਚਾਓ ਕੋਈ ਆ ਸਾਵਣ ਨੱਥੇ ਰੱਤੇ ਰੰਗ ਬਟਾਲੋ ਆਨੇ ਮੋਰੀ ਹੋ ਜਾਏ ਆਕੀ ਖਾਵੋ ਮਾਸ ਕਟਾਕੀ ਪੁੱਤ ਅਬਨੇਓ ਰਜ ਮੋਰੀ ਨਾੜ ਸੰਜਾਪੋ ਅਜ ਥੀ ਆਪਣੇ ਦੀਵੇ ਪਰਣ ਅਗਾਸੀ ਚੰਨ ਚੜੇ ਕੁਲ ਆਲਮ ਵੇਖੇ ਕੋਈ ਨਾ ਰਹਿ ਜਾਏ ਬਾਕੀ ਮੈਂ ਮੋਰੀ ਮੈਂ ਆਕੀ ਛੂ ਜੋ ਕਾਰੋ